ਸ਼ਲੋਕ ਮਹੱਲਾ 5ਵਾਂ ਚੰਗਿਆਈਆਂ ਆਲਕ ਕਰੇ ਬੁਰਾਈ ਹੋਏ ਸ਼ੇਰ ਨਾਨਕ ਅੱਜ ਕੱਲ ਆਪਸੀ ਗਾਫਲ ਫਾਹੀ ਪੇਰ ਬੁਰਾਈ ਵਾਲੋਂ ਦਾ ਜਾਨਣਾ ਛੇਰ ਉਹ ਮਾਰ ਕੇ ਅੱਛਾ ਜੀ ਜਗਿਆਈ ਵਾਲੋਂ ਛੱਡੋ ਪਰੇ ਕੀ ਜਾਲ ਉਹਦਾ ਜਾਣ ਲਗਾ ਕਰਦਾ ਠੀਕ ਹੈ ਜੀ ਮੰਦੀ ਗੱਲ ਹੈ ਜੀ ਦਿਗਮਲ ਲੈ ਮਰ ਕੀ ਕਰ ਸਕਦਾ ਵਿਚਾਰਾ ਮਾਨਦੇ ਕੁਝ ਵੀ ਕਰਦਾ ਕਰਦਾ ਜਿੱਤੇ ਅੱਛਾ ਸਾਰਾ ਜਮਾ ਜਿੱਤੇ ਸਤੇ ਬੰਦੇ ਸਤੇ ਕੁਝ ਨਹੀਂ ਮੱਤਦਾ ਉਹਦਾ ਹੀ ਆ ਕਿ ਕੈਦਾ ਨਾ ਸ਼ੀਸ਼ਾ ਤੋੜ ਦਵੇ ਗੈਰ ਮਾਰ ਲੈ ਤਾ ਤੁਸੀਂ ਗੈਨ ਲੈ ਤੇ ਨਾਲੇ ਕਿ ਸ਼ੀਸ਼ਾ ਕਦੇ ਤੋੜਦਾ ਠੀਕ ਹੈ ਜੀ ਚੰਗੇ ਆਈ ਹੋਏ ਸ਼ੇਰ ਨਾਨਕ ਅੱਜ ਕੱਲ ਆਪਸੀ ਗਾਫਲ ਫਾਈ ਪੇਰ ਨਾਨਕ ਜੀ ਕੱਲ ਬਸ ਮੇਰੇ ਪੈਰ ਚ ਫਾਈ ਫਸੀ ਪਈ ਕੇ ਲੈ ਜਾਣਾ ਆ ਕੇ ਲਜਾਣ ਨੂੰ ਜਿਵੇਂ ਕਟੂਰ ਲੈ ਜਾਂਦੇ ਨੇ ਖਿੱਚ ਕੇ ਨਾ ਪੈਰ ਚ ਫਾਈ ਲੈ ਜਾਣਾ ਠੀਕ ਹੈ ਮਹੱਲਾ ਪੰਜਵਾਂ ਨਾਨਕ ਤੈ ਸਹ ਟਕਿਆ ਮਨ ਮਹਿ ਸੱਚਾ ਮਿੱਤ ਵੜੇ ਕੋ ਕੰਮ ਕੀਤਾ ਧੱਗਦੇ ਕੀਤੇ ਕੁਟੰਗਾ ਕਿਨਾ ਕੀਤੇ ਬੁੱਧੀਆਂ ਨੇ ਕੀਤੇ ਕੁਟੰਗ ਵਰਤੇ ਧੰਗ ਦੀ ਵਰਤ ਚੰਦ ਵਰਤਦਾ ਗੁਰਬਾਨੀ ਲੈਂਦਾ ਗਿਆਨ ਲੈਂਦਾ ਆਪਨਾ ਸਹਿਮਤ ਰਹਿਣਾ ਆਪੇ ਬਣ ਜਾਣੀ ਕੀਤਾ ਸਰਕਾਰ ਨਾ ਜਾਣ ਲਿਆ ਕੁਟੰਗ ਕਰਕੇ ਗੁੱਜੇ ਫੇਰ ਰਹੇ ਯਾਰ ਫੇਰ ਹੋਗੇ ਚੋਰੀ ਤੇ ਕੁਟੰਗ ਕੀਤੇ ਅੰਦਰ ਚਿਤਵੇ ਗੁੱਝੇ ਦੀ ਰਹੇ ਔਰ ਨਾ ਹਿਤ ਵਿੱਚ ਰਹੇ ਕਲੰਕ ਵੀ ਮਿਲਿਆ ਆਉ ਤੋ ਕੀ ਮਿਲਿਆ ਆਉ ਤੋ ਵੀ ਹੋਇਆ ਵੀ ਨਹੀਂ ਰਹੇ ਜਿਹਨਾਂ ਦਾ ਕੀ ਵਿਗੜਿਆ ਤੇ ਰੱਖੀ ਬਚਿਆ ਫਿਰ ਤੇ ਰਹਿ ਜੀ ਤੇ ਖਿਲਾਫ ਵਰਤੇ ਫਿਰ ਤੇ ਵਿੱਚ ਰਹਿ ਜਿਹੜਾ ਤਤੀ ਤਵੀ ਤੇ ਬੈਠਿਆ ਠੀਕ ਹੈ ਜੀ ਗੁੱਝਾ ਕੀ ਨਾ ਹਿੱਤ ਨਾ ਗੁਜਾ ਰੰਦਾ ਨਾ ਹਿੱਤ ਵਿੱਚ ਰੰਦਾ ਕੁਟਾ ਅੱਛਾ ਜੀ ਠੀਕ ਹੈ ਜੀ ਨਾਨਕ ਤੈਸੈ ਟਕਿਆ ਮਨ ਮਹਿ ਸੱਚਾ ਮਿੱਤ ਉਹ ਤੇਰਾ ਬਿੱਤਰ ਬੈਠਾ ਸੀ ਸੱਚਾ ਅੰਦਰ ਉਹਦੀ ਨਹੀਂ ਬੰਦੀ ਉਹਨੂੰ ਧੱਕ ਕੇ ਪਰੇ ਮਾਰਿਆ ਉਹਦੀ ਸੁਣੀ ਨਹੀਂ ਉਹ ਕਹਿੰਦਾ ਸੀ ਕੰਮ ਨਾ ਕਰ ਰਹੇ ਉਹਨੂੰ ਧੱਕੇ ਦੇ ਕੇ ਘਰੋਂ ਕਰਤਾ ਉਹਨੂੰ ਧੱਕਾ ਦੇ ਕੇ ਘਟਿਆ ਆ ਸੱਚਾ ਬੱਤਰਤਾ ਅੰਦਰ ਬੈਠਾ ਸੀ ਤੇਰੇ ਉਹਨੇ ਰਹਿ ਨਹੀਂ ਸੀ ਦਿੱਤੀ ਯੂਦੀ ਨਹੀਂ ਸੀ ਚਾਹੇ ਇਹ ਕੁਟਾਮ ਕਰ ਤੂੰ ਫਤਾਲੀ ਨਹੀਂ ਬਣੀ ਤਾਂ ਪਰੇ ਤੱਕਦਾ ਤੇਰੀ ਦੀ ਤੂੰ ਬੈਠਾ ਰਹਿ ਆ ਰਾਮ ਸੱਚਾ ਜੀ ਨੇ ਤੈਨੂੰ ਰਹਿ ਦਿੱਤੀ ਸੀ ਇਹ ਕਬੂਲ ਕਰ ਪਰ ਤਾਂ ਪਰੇ ਤੱਕਦਾ ਵਿਚਾਟ ਵਿਚ ਤੂੰ ਤੇਰੇ ਦੋਹਾਂ ਰਲ ਕੇ ਤੱਕਦਾ ਗੱਲ ਕੀ ਹੈ ਗੱਲ ਪ੍ਰਤੀਏ ਹੈ ਜਦ ਬਣਾਈ ਸੀ ਜਵਾਨਾ ਫਤਿਹ ਦਾ ਵੀ ਕਰਾਂ ਪਰ ਫੇਰ ਵੀ ਲੋਕਾਂ ਨੇ ਜਿਹੜੇ ਨਾਲ ਲੋਰ ਜੁੜੇ ਤੇ ਨਾਲ ਮੁਸੱਦ ਮੁਸੱਦਾਂ ਨੇ ਫੂਕਾ ਮਾਰੀਆਂ ਕਾਰਾੜੀ ਨੇ ਫੂਕਾ ਜੋਰ ਪੈ ਗਿਆ ਜੂਰ ਪਾਸੇ ਜੂਰ ਪਾਸੇ ਜੋਰ ਪੈ ਗਿਆ ਵਿਚਾਰਾ ਕੱਲਾ ਰਹਿ ਗਿਆ ਉਧਰ ਪੰਚਾਇਤ ਬਣ ਗਈ ਇੱਕ ਪਾਸੇ ਪੰਚਾਇਤ ਬਣ ਗਈ ਇੱਕ ਪਾਸੇ ਕੱਲਾ ਰਹਿ ਗਿਆ ਉੱਥੇ ਬਗੜ ਗਿਆ ਵਿਚਾਰਾ ਠੇਰਾ ਚੱਲ ਕੇ ਦੇਖੋ ਰੋਡੀ ਹਉ ਮੰਗੋ ਤੁਝੇ ਦਇਆਲ ਕਰਦਾਸਾਂ ਗੋਲਿਆਂ ਨੌਨਿਡਪਾਈ ਰਾਜ ਤੁਝੇ ਦਇਆਲ ਅਰਦਾਸਾਂ ਗੋਲਿਓ ਤੇ ਦਇਆਲ ਮੈਂ ਤੈਨੂੰ ਬਗਨਾ ਗੁਲਾਮ ਬਣਾ ਲੈ ਮੇਨੂੰ ਆਪਣਾ ਕੋਈ ਤਨਖਾਹ ਨਹੀਂ ਲੈਣ ਦੀ ਮੈਂ ਲੈਣਾ ਕੁਛ ਨਹੀਂ ਰੋਟੀ ਕਪੜਾ ਤੂੰ ਪਹਿਲਾਂ ਵੀ ਦੇਵੇਂ ਫੇਰ ਵੀ ਦੇਈ ਜਾਣਾ ਪਰ ਆਪਣਾ ਗੁਲਾਮ ਬਣਾ ਲੈ ਦਾਸ ਦਾ ਪਹਿਲਾਂ ਆਉਣ ਗੋਲਾ ਬਣਾ ਲੈ ਦਾਸਰ ਗੋਲੇ 'ਚ ਫਰਕ ਹੈ ਆ ਦਾਸ ਤਾਂ ਵਜ਼ੀਰ ਵੀ ਹੁੰਦੇ ਨੇ ਰਾਜੇ ਦੇ ਰਾਤ ਸਾਰੇ ਬੜਵਡੇ ਅਫਸਰ ਵੀ ਹੁੰਦੇ ਨੇ ਜਿਹੜਾ ਬਰਾਬਰੀ ਨਹੀਂ ਕਰਦਾ ਦਾਸ ਦਾਸ ਤਾਂ ਰਾਜਾ ਨੇ ਰਾਜੇ ਵੀ ਹੁੰਦੇ ਨੇ ਗੋਲੇ ਲੈ ਸਕਦਾ ਗੋਲੇਦਾਰੀ ਇਸਰਜ ਨਾ ਹੀ ਹੁੰਦਾ ਕਿਤੇ ਅੱਛਾ ਪਾਟਿਆ ਉਹਦਾ ਗੋਲੇ ਦਾ ਆਗਰ ਗੋਲਾ ਕਰਦਾ ਰਾਜਾ ਬਣ ਜਾਂਦਾ ਕਰਦਾ ਮਾਂਗ ਤੋਂ ਗੋਲਾ ਹੀ ਬਣਦਾ ਕਰਦਾ ਇੱਜ਼ਤਾਰੇ ਹਾਂਜੀ ਨੌਨੇ ਦੀ ਪਾਈਂ ਰਾਜ ਜੀਵਾ ਬੋਲਿਆ ਚੌਧਾ ਰਹ ਬੋਲਦਾ ਰਹਾਂ ਔਰ ਨੌਨੇ ਰਾਜ ਦੀ ਪ੍ਰਾਪਤ ਹੋ ਗੋਲੇ ਨੂੰ ਨੌਨੇ ਰਾਜ ਪ੍ਰਾਪਤ ਹੋ ਜਾਂਦਾ ਹਮੇਸ਼ਾ ਲਈ ਸਦ ਜੀਵਨ ਬਣ ਜਾਂਦਾ ਹੈ ਸਦਾ ਹੀ ਬੋਲਦਾ ਰਹਿੰਦਾ ਜਮਨ ਬੰਦ ਕਟਿਆ ਜਾਂਦਾ ਠੀਕ ਹੈ ਸਦ ਜੀਵਾ ਬੋਲਿਆ ਬੋਲਦਾ ਵੀ ਸਦਾ ਰਹਾਂ ਥਾਕਰ ਹਮਰੋ ਸਦ ਬੋਲੰਤੋ ਠੀਕ ਹੈ ਜੀ ਨੌਨੀਤੀ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾਂ ਘਰ ਕਣਾ ਦਾਸਾਂ ਨੇ ਘਰ ਮੁਤ ਨਾਮ ਨਿਧਾਨ ਬਹੁਤ ਹੁੰਦਾ ਰਹੀ ਹੁੰਦਾ ਜੇ ਕੀ ਰਿਹਾ ਹੈ ਬਾਦਾ ਗੋਲਾ ਨੱਗ ਲਿਆ ਸਭ ਕੁਝ ਹੈ ਬਣ ਗਿਆ ਕਰਦਾ ਜੋ مالک ਹੈ ਹਾਂਜੀ ਘਰ ਕਣਾ ਘਰੇਗਾ ਇਹ ਘਣਾ ਹੀ ਹੈ ਜੋ ਗੋਲਾ ਘਰੇ ਘਣਾ ਹੀ ਹੈ ਆਪਣਾ ਹੀ ਹੈ ਸਭ ਕੁਝ ਜੇ ਤੂੰ ਮੇਰਾ ਹੋ ਰਹੀਂ ਤਾਂ ਸਭ ਜਗ ਤੇਰਾ ਹੋਏ ਤਿੰਨ ਕੈ ਸੰਗੀ ਨਿਹਾਲ ਸਰਵਣੀ ਜਸ ਸੁਣਾ ਜਿਦਕੇ ਕੇ ਨਿਹਾਲ ਸਰਵਣੀ ਜਸ ਸੁਣਾ ਉਹਨਾਂ ਦੇ ਨਾਲ ਸੰਗਤ ਕਰਾਂ ਜਿਵੇਂ ਗੁਰੂ ਹੈ ਉਹ ਕਤ ਗੁਰਮ ਕਹਾਂ ਮੌਕਤ ਹੈ ਉਹਨਾਂ ਦੇ ਸੰਗਤ ਕਰਾਂ ਗੁਰਮਖਾਦੀ ਐਸਿਆਂ ਦੀ ਨਿਹਾਲ ਰਹ ਸਰਵਣੀ ਜਸ ਸੁਣਦਾ ਰਹ ਉਹ ਨਿਹਾਲ ਰਹ ठीक है तिनकी कार शरीर कार कार पवित्र होए पखा पानी पीस दिगसा पैर धोए ओना वास्ते कार कमाबो ओना वास्ते कार कमाबो मेरा शरीर पवित्र शब्द विचार करاں کہ میرا पवित्र ہو گا শব্দ विचार انہاں دے کام اوں گا শব্দ विचार کیتی पवित्र ہو جائے ہاں پکھا پانی ਪੱਕਾ ਚੱਲੂਗਾ ਗਿਆਨ ਦੇਦਰੋਂ ਬਾਹਰ ਨਿਕਲੂਗਾ ਦੁਗਿਆ ਨੂੰ ਮਿਲੂਗਾ ਤੇਵਾ ਵਿਗਿਆਨ ਚਰਨ ਤੋਂ ਹੈ ਕਾਰ ਤੋਂ ਹੈ ਵਿਗਸ ਮੇਰਾ ਵਿਗਾਸ ਕਦੋਂ ਹੋਊਗਾ ਮੇਰੇ ਅੰਦਰ ਵਾਦਾ ਕਦੋਂ ਹੋਊਗਾ ਮੇਰੇ ਗੱਲ ਜਵਾਦਾ ਕਦੋਂ ਹੋਊਗਾ ਮੇਰੇ ਚਾਣ ਕਦੋਂ ਹੋਊਗਾ ਕਿਉਂ ਮੈਂ ਸੁਨਾ ਤੁਰ ਕੀ ਬਾਣੀ ਪੈਰ ਧੋ ਕੇ ਮੈਂ ਕੋ ਰੱਖਣਾ ਪੀਣਾ ਉਹ ਜੋ ਬੇਬੀ ਕੋ ਸਖਲਾ ਆਹ ਤਿੰਨ ਚੀਜ਼ਾਂ ਦੱਸਾਂਗਾ ਜੀ ਪੱਖਾ ਪਾਣੀ ਪੀਸ ਏਦਾ ਕੀ ਭਾਵ ਬਣਦਾ ਪੱਖਾ ਦਾ ਹਵਾ ਜਿਹੜੀ ਦਰੋਲਦੀ ਹੈ ਅੱਛਾ ਪਾਣੀ ਪਾਣੀ ਗਿਆਨ ਅੱਛਾ ਜੀ ਪੀਸ ਪੀਸ ਪਹਿਲਾਂ ਦੱਸਿਆ ਹੋਇਆ ਗਿਆਨ ਉਹਨੂੰ ਦੁਬਾਰਾ ਦੱਸਿਆ ਕਿਉਂ ਦੱਸਿਆ ਦੁਬਾਰਾ ਕੋਈ ਰੋੜੀ ਪਿਓ ਜੇ ਸਮਝ ਚੀ ਨਹੀਂ ਆਉਂਦੀ ਕੋਈ ਗੁਣ ਜੀ ਸੀ ਉਹ ਚਾਹੇ ਸਮਝ ਨਹੀਂ ਆਉਂਦੀ ਉਹਨੂੰ ਹੋਰ ਫਰੀਕ ਕਰਕੇ ਸਮਝਾਈਏ ਗੱਲ ਠੀਕ ਹੈ ਜੀ ਇਹਨਾਂ ਨੂੰ ਮੈਂ ਪਲੇਖਾ ਪੈਂਦਾ ਕਿ ਤੇ ਫਿਰ ਪਾਣੀ ਲੈ ਕੇ ਆਵਾਂ ਤੇ ਨਾਲੇ ਗੁਰੂ ਵਾਸਤੇ ਜੋ ਵੀ ਹੈ ਲੰਗਰ ਵਾਸਤੇ ਦਾਣੇ ਪੀਸਾਂ ਇਹ ਜੀ ਦੀ ਗੱਲ ਨਹੀਂ ਹੈ ਗੁਰੂ ਦਾ ਹੁੰਦਾ ਹੈ ਵਾਸਤੇ ਪੀਸਦਾ ਉਹ ਤਾਂ ਛਰੀਰ ਪਰ ਅੰਦਰਲਾ ਛਰੀਰ ਹੈ ਜੀ ਜਿਹਨਾਂ ਪਤਾ ਨਹੀਂ ਗੁਰੂ ਕੁਝ ਰੋਟੀ ਖਾਂਦਾ ਹੁੰਦਾ ਹੈ ਖਾਂਦਾ ਹੁੰਦਾ ਗੁਰੂ ਕੀ ਹੁੰਦਾ ਛਰੀਰ ਹੁੰਦਾ ਨਹੀਂ ਹੁੰਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਦੇ ਅਰਥ ਦੱਸਣ ਦੀ ਵੀ ਲੋੜ ਨਹੀਂ ਹੈ। ਉਹਨਾਂ ਦੇ ਸਭ ਚੌੜੇ ਨੇ। ਪਰ ਉਹ ਕਰਵਾਉਂਦੇ ਕੇ ਦੱਸ ਦੋਗੇ ਤਾਂ ਵੀ ਗਲਦ ਉਹ ਐਸੀ ਅੱਗੇ ਇੱਕ ਲਾਉਂਦੇ ਹਣ ਚਾਰੇ ਪਾਸੇ ਐਸੀ ਲਾਇਆ ਗਲਦ ਗੇ। ਖਾਣੇ ਖਵਰੇ ਪੂਰੇ ਪੂਰੇ ਵੀ ਹੋ ਗਏ ਉਹ ਕੱਢ ਜਾਈਏਗਾ ਉਹਨਾਂ ਨੇ ਕਿਹਾ ਸੀ ঠিক ਹੈ ਉਹਨਾਂ ਦਾ ਬਿਜ਼ਨਸ ਹੈ ਉਹਨਾਂ ਨੇ ਹਰ ਸਾਲ ਐਸੀ ਬਦਲ ਲੈਣੇ ਉਹ ਆਪ ਲੈ ਜਾਣੇ ਨੇ ਅੱਧੀ ਜਿਹੜੀ ਕੀ ਬਥੇ ਨਾ ਕੇ ਲਾ ਦੇਣੇ ਉਹਦਾ ਬਿਜ਼ਨਸ ਹੈ ਨਹੀਂ ਪਰ ਜਦੋਂ ਸਰੀਰ ਦਾ ਥੋੜਾ ਭੁਲਿਕਾ ਪੈਣਾ ਨਾ ਕਮਾਵਾ ਤਨ ਕੀ ਕਾਰ ਸਰੀਰ ਪਵਿੱਤ ਹੋਏ ਇਹਵੇ ਮੰਨ ਦੇ ਪਦਰਤ ਕਾਰਕ ਕਮਾਉਣੀ ਐ ਤੇ ਹਿਰਦਾ ਪਵਿੱਤ ਹੋਵੇ ਬਿਲਕੁਲ ਨਹੀਂ ਕਮਾਉਣੀ ਬਿਲਕੁਲ ਨਹੀਂ ਕਮਾਉਣੀ ਬੰਦੇ ਪਦਰਤ ਕਾਰਖ ਬੋੜੀਆਂ ਤਨ ਕੀ ਕਾਰ ਉਹਨਾਂ ਦਾ ਜਨਮ ਨਹੀਂ ਲਿਆ ਉਹਨਾਂ ਨੂੰ ਲਾਭ ਕਦੇ ਉਹ ਜਨਮ ਦਾ ਲਾਭ ਉਹਨਾਂ ਨੇ ਉੱਕੀ ਘਟ ਕੇ ਜਾਣਗੇ ਜੋ ਉਹਨਾਂ ਖਾਤਰ ਤਾਲ ਕਮਾਵਗੇ ਤਾਂ ਹੀ ਘਟ ਕੇ ਜਾਣਗੇ ਕੋਈ ਭਾਈ ਜਿਹੜੇ ਕੋਈ ਪੜਦੇ ਨੇ ਪਹਿਨਾ ਪੜਾਉਦੇ ਨੇ ਪੜਦੇ ਨੇ ਫੇ ਪੜਾਉਦੇ ਇਹੋ ਕਾਲ ਦੀ ਐ ਪੜਨ ਕਾਲ ਦੀ ਐ ਪੜਾਉਣਾ ਵੀ ਕਾਰ ਹੈ ਭਾਵੇਂ ਪੜਨਾ ਕਾਰ ਦੀ ਹੈ ਪੜਾਉਣਾ ਕਿਸੇ ਖਤਰਕਾਰ ਕਰਦੀ ਹੈ ਪੜਨਾ ਆਪਣੇ ਵਾਸਤੇ ਪੜਨਾ ਕਾਰ ਕਰਦੀ ਆ ਪੜਾਉਣਾ ਵੀ ਆਪਣੇ ਵਾਸਤੇ ਦੀ ਕਿਸੇ ਕਾਰ ਕਰਦੀ ਪੜਾਉਣਾ ਪੜਨਾ ਪੜਨਾ ਵੀ ਜੇ ਪੜੂਗਾ ਨੌਕਰੀ ਵਾਸਤੇ ਪੜੂਗਾ ਕਿਸੇ ਵਾਸਤੇ ਪੜਦਾ ਆਪਣੇ ਵਾਸਤੇ ਪੜਦਾ ਆਪਣੇ ਵਾਸਤੇ ਤਾਂ ਢਿੱਡ ਦੀਆਂ ਰੋਟੀਆਂ ਵਾਸਤੇ ਪੜਦਾ ਜੋ ਪੈਰ ਦੁਰ ਕੇ ਚੱਲਦੇ ਲੋਕ ਹੈ ਉਹ ਜੋ ਮੈਨੂੰ ਪ੍ਰਾਪਤ ਹੋਊ ज्ञान 받ਦਾ ਨਾ ਮਿਲੂ ਵੀ ਦਾ ਪ੍ਰਾਪਤ ਹੋਊ ਕੁਝ ਗਿਆਨ ਉਹਦੇ ਨੂੰ ਬਿਦੂ ਬਗਾਸੂ ਵੀਰੇ ਅੰਦਰ ਚਾਨਣ ਵੇਖਾਂ ਪੈਰ ਤੋਂ ਬਹੁਤ ਮੁਸ਼ਕਲ ਗੱਲ ਹੈ ਆਪੋ ਕਸ਼ਮਨਾ ਹੋਏ ਪ੍ਰਭ ਨਦਰ ਨਿਹਾਲੀ ਹੈ ਮੋਹਿ ਨਿਰਗੁਣ ਦੀਚੇ ਹੈ ਆਪੋ ਕਜੁਨ ਹੋਏ ਆਪਣੇ ਆਪ ਦਾ ਕੁਝ ਦਿਓ ਸੰਗ ਪ੍ਰਭ ਨਦਰ ਨਿਹਾਲੀ ਹੈ ਮੈਂ ਨਹੀਂ ਇੱਥੇ ਜਗਾ ਪ੍ਰਾਪਤ ਕਰ ਸਕਦਾ ਮੈਨੂੰ ਤਾਂ ਘਰਨਾ ਦੀ ਬਣਦਾ ਇਹ ਤੇ ਕਿਰਪਾ ਕਰਨ ਤੁਸਨ ਨਿਹਾਲੀ ਹੈ ਬਦ ਨਾ ਤਾਂ ਦੀ ਚਾਥਾ ਸੰਤ ਧਰਮਸ਼ਾਲੀ ਹੈ ਤਾਂ ਕਾਦੀ ਤਾਂ ਰਸਾਲਾ ਦੇ ਵਿੱਚ ਠੀਕ ਹੈ ਬਿਠਾਉਂ ਦੇ ਦੇ ਕੋਈ ਜੂ ਵੀ ਆਪਣੇ ਨਾਲੇ ਬਿਠਾ ਸੰਤ ਅਖਰ ਇੱਥੇ ਵੀ ਪਲੂਰਲ ਆਇਆ ਤੇ ਸੰਤਨ ਵੀ ਜਦੋਂ ਪਲੂਰਲ ਆਉਂਦਾ ਇਹਦਾ ਭਾਵ ਸੱਚਖੰਡ ਦੀ ਗੱਲ ਹੈ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਕਿਉਂਕਿ ਇੱਥੇ ਕੋਈ ਬਿਰਲਾ ਸੰਤ ਹੈ ਇੱਥੇ ਵਾਸਤੇ ਸੰਤਨ ਅਖਰ ਆਉਣਾ ਮੁਸ਼ਕਲ ਹੈ ਜੀ ਉਹ ਤਾਂ ਨਜ਼ਰੀਏ ਸੰਤਾਂ ਦੀ ਹੈ ਠੀਕ ਹੈ ਜੀ ਉਹਦੇ ਵਾਸਤੇ ਸੰਤ ਨੇ ਸਾਰੇ ਤੇ ਸੰਤ ਨੇ ਸਾਰੇ ਵਾਸਤੇ ਜਿਹੜਾ ਸੰਤ ਬਣਿਆ ਉੱਥੇ ਜਦੇ ਚਲੇ ਜਾਂਦਾ ਬਣੂਗਾ ਚਲੇ ਜਾਊਗਾ ਕੌਣ ਆਨੇ ਬਣਦਾ ਹੈ ਉਹ ਪੁਰਜਾ ਕਈ ਥਾਂ ਘਸਦਾ ਕਈ ਥਾਂ ਖਰਾਸਤੇ ਚੜਦਾ ਕਈ ਤਾਂ ਕੋਸ਼ ਐਵੇਂ ਡੋਰਿਕਪੁਰ ਜਾਵਣ ਜੀ ਉਹਦਾ ਕੋਈ ਫੇ ਚੂੜੀ ਖਰਾਬ ਹੋ ਜਾ ਕਿਤੇ ਹਾਂਜੀ ਦੁਬਾਰਾ ਢਾਲਣਾ ਪੈ ਜਾਏ ਇਹ ਦੁਬਾਰਾ ਪੱਖਾ ਪੀਸ ਦੁਬਾਰਾ ਚੱਲਣਾ ਪੈਣਾ ਕੰਮ ਦੁਬਾਰਾ ਚੱਲਣਾ ਪੈਣਾ ਕੀ ਬਗਾ ਤਾਂ ਕੀ ਹੋਣ ਠੀਕ ਹੈ ਜੀ ਅੱਜ ਹੋਸ ਤਾਂ ਨਾ ਜੀ ਹਾਂ ਜਦੋਂ